राड़े रूड़ा हर हरजियो सोई तिस बिन राजा अवर न कोई राड़े रूड़ा हरजियो सोई राले अक्षर दे नाल है रूड़ा घने ने, ने सुंदर सोड़ अच्छा जी रूड़ा सोड़े नु सुंदर रूड़ा हरजियो सोई जो हरजियो है वो तो सुंदर और कुछリエ संसार ਜੋਤ ਹੈ ਉਹ ਨੋ ਤੋਂ ਸੁੰਦਰ ਕੁਛ ਨਹੀਂ ਹੈ ਜੋ ਸੁੰਦਰਤਾ ਬਣਾਈ ਹੈ ਜੋਤ ਦੀ ਵਜ੍ਹਾ ਨਾਲ ਸੁੰਦਰਤਾ ਹੈ ਬੈਟਰ ਦੀ ਸੁੰਦਰਤਾ ਇਹ ਕਰਕੇ ਆ ਉਹਦੇ ਵਿੱਚ ਜੋਤ ਹੈ ਅੱਛਾ ਜੀ ਜਾਂ ਜੋਤ ਨਿਕਲ ਜਾਂਦੀ ਹੈ ਰੂਪ ਬਣ ਜਾਂਦੀ ਹੈ ਹੂੰ ਹੂੰ ਰੂਪ ਦਿੱਤਾ ਹੈ ਉਹ ਅੱਛਾ ਹਰ ਜੀਓ ਅਲੱਗ-ਅਲੱਗ ਅੱਖਰਾਂ ਜੀ ਹਰ ਵਾਸਤੇ ਰਿਸਪੈਕਟਫੁਲੀ ਲਿਖਿਆ ਹਰ ਜੀਓ ਇਹ ਰੈਕਟਿਫਾਈ ਹੋਇਆ ਹੈ। ਅੱਛਾ ਜੀ। ਰਾੜਾ ਹਰ ਜੀਉ ਸੋਈ ਤਿਸ ਰਾਜਾ ਵਰਨਾ ਕੋਈ। ਜਿਸ ਵੇਲੇ ਰਾਜਾ ਵਰਨਾ ਕੋਈ ਹੂੰ ਕਿ 10:00 ਲਾਫ ਦੇ 1 ਵਜੇ ਨੇ ਆਇਆ ਹੋਇਆ। ਹਾਂਜੀ। ਕਿ ਜੀਉ ਇਹਦੇ ਪਿੱਛੇ ਵਜੇ ਤੇ ਹੁੰਦਾ ਹੁੰਦਾ। ਅੱਛਾ ਜੀ। ਜਾ ਜੀਓ ਹਰ ਜੇ ਵਿੱਚ ਸਮਾਇਆ ਹੋਇਆ ਇਹ ਤਾਂ 1 ਜੀਓ ਅੱਛਾ ਜੀ ਇਸ ਵਿੱਚ ਮਹਾਰਾਜਾ ਅਵਰਨਾ ਕੋਈ ਹੈ ਜੀ ਕੋਈ ਹਰ ਸਮਾਨ ਨਹੀਂ ਰਾਜਾ ਉਹਦੇ ਮੈਨਾਂ ਕਹੌਣ ਲੈ ਜੀਓ ਲੱਭਦਾ ਆ ਉਹ ਵਾਸਤੇ ਜਿਹੜਾ ਇੱਕ ਹੈ ਉਪਯੋਗਕਾਰ ਦੇ ਪਹਿਲਾਂ ਜਿਹੜਾ ਇੱਕ ਹੈ ਉਹ ਹਰ ਜੀਓ ਹੀ ਹੈ ਅੱਛਾ ਵਾਸਤੇ ਆਇਆ ਹੋਇਆ ਹੈ ਠੀਕ ਹੈ ਜੀ ते सिबिने राजा अवरना कोई उस तो बिना कोई राजा है नहीं ठीक है और राड़े कारुड़ तुम सुनो हर वसै मन माहे गुरु प्रसादी हर पाई है मत को भ्रम पुलाए और तुम सुन ਅ ਗਿਆਨ ਦੀ ਗੱਲ ਸੁਣ ਲਓ ਗਿਆਨ ਦੀ ਗੱਲ ਗਾਰੜ ਗਿਆਨ ਹੈ ਅੱਛਾ ਜੀ ਗਿਆਨ ਵਾਲ ਗਾਰੜ ਹੈ ਗਾਰੜ ਗਿਆਨ ਹੈ ਨੂੰ ਸੁਣ ਲਓ ਸੁਣ ਲਓ ਗਾਰੜ ਉਹ ਪਰ ਤਵੇ ਰਹੇ ਹੈ ਜੋਗੀ ਜਾਇ ਪੜ ਪੜਦਾ ਜੋਗੀ ਵਰਦੇ ਰਹੇ ਗਾ ਰੱਲੋ ਹੂੰ ਹੂੰ ਘਾਰੋਂਦ ਤੁਮ ਸੁਣ ਲੋ ਹੂੰ ਹੂੰ ਹਾਰੇ ਬਸ ਸੇ ਕੰਮ ਹੋਏ ਹਾਂ ਹਾਂ ਹਾਰੇ ਮਾਨਵ ਕੇ ਵਾਸਤੇ ਹਰ ਤਿਰ ਕੁੜੀ ਜਿ ਨਹੀਂ ਵਰਦਾ ਤੇਰੀ ਕੁੜੀ ਜਮਨਦਾ ਘੱਲ ਜਾਂਦਾ ਮਨ ਵਸਦਾ ਨਹੀਂ ਤੇਰੀ ਕੁੜੀ ਤੇਗੋ ਤੇਰੀ ਕੁੜੀ ਜਮਨ ਵਸਦਾ ਕਰੇ ਨਹੀਂ ਹੈ ਧਿਆਨ ਤੇਰੀ ਕੁੜੀ ਜਰੂਰ ਕਰਦਾ ਜਾਂ ਤਾਂ ਜਦੇ ਜਾ ਸਕਦਾ ਬੈਠੇ ਤੋਂ ਦੂਰ ਜਾ ਸਕਦਾ ਹਰ ਬਸ ਤੇ ਮਨ ਬਹੇ ਹਰ ਜਿਹੜਾ ਮੂਲ ਹੈ ਮਨ ਕੋਈ ਇਸ ਕਰਕੇ ਮਨ ਬੁੱਧਰ ਬੁੱਧਾ ਨੂੰ ਬੁੱਧ ਕੇ ਆਇਆ ਬੁੱਧ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਪਰਮ ਪੁਲਾਇ ਗੁਰ ਪ੍ਰਸਾਦੀ ਹਰ ਪਾਈਐ ਗੁਰ ਪ੍ਰਸਾਦੀ ਗਿਆਨ ਦਾ ਪ੍ਰਸਾਦ ਕਿਤੋਂ ਮਿਲ ਜਵੇ ਨਾ ਗੁਰ ਮਤਲਬ ਹੈ ਕੋਈ ਸਤਿਗੁਰੂ ਨਹੀਂ ਹੈ ਹਾਂ ਨਾ ਹੋ ਸਕਦਾ ਸਤਿਗੁਰੂ ਦੇ ਜੇ ਕਰਬਾਨਾ ਭੇਜਦੇ ਸਾਹਿਬ ਨੂੰ ਦੇ ਦਸਾਨਾ ਤਾਂ। ਕਿ ਆਪਣੇ ਪ੍ਰਸਾਦ ਮੈਂ ਜਿਹਨੂੰ ਗਿਆਨ ਮਿਲ ਜਾਂਦਾ ਸਮਝ ਆ ਜਾਂਦਾ ਉਹਨੂੰ ਮਿਲ ਜਾਂਦਾ। ਆਦਮੀ ਦੇ ਵਾਸਤੇ ਗੱਲ ਲਈ। ਹਾਂ। ਆ ਆਦਮੀ ਦੇ ਵਾਸਤੇ ਆਦਮੀ ਦੀ ਆਦਮੀ ਦੇ ਪਾਵਰ ਤੋਂ ਹੀ ਪਰੇ ਕਰਤੀ ਗੱਲ। ਹਾਂ। ਗਿਆਨ ਦੀ ਗਿਆਨ ਦੀ ਕਰਬਾਨਾ ਮਿਲਦਾ। ਉਹ ਕਿਹਨੂੰ ਮੁਝਵੇਂ ਔਰ ਤੋੜ ਲੈਂਦਾ ਲੱਭਣਾ ਦਾ ਆਪਣੇ ਇੰਦਰੋਂ ਦਾ ਜਾਇਜੀ ਸਰਦਾ ਗੁਰਪ੍ਰਸਾਦੀ ਹਰ ਪਾਈ ਹੈ ਹਰ ਕੋ ਪਰਪਲਾਈ ਹਾਂਜੀ ਕੋਈ ਐਸੇ ਪਰਪ ਦੇ ਵਿੱਚ ਪਿਆ ਰਹੇ ਕਿ ਕਿਤੋਂ ਹੋਰ ਮਿਲ ਜੂਗਾ ਪਰ ਐਸੇ ਬੜੇ ਪ੍ਰਚਾਰ ਹੋ ਰਹੇ ਆ ਦੇ ਵਿੱਚ ਵੀ ਕਿਤੋਂ ਹੋਰ ਮਿਲ ਜੂਗਾ ਬਾਵਜੂਦ ਇਸ ਸੰਕਤੀ ਦੇ ਸਾਫ ਸਪੱਸ਼ਟ ਲਿਖੀ ਹੋਈ ਦੇ ਹਾਂਜੀ ਗੈਰ ਵੀ ਪ੍ਰਚਾਰ ਸਿੱਖੀ ਦੇ ਕਰੀ ਜਾਂਦੇ ਦੇ ਹਾਂਜੀ ਜਿਹੜੇ ਸਿੱਖੀ ਵਿਰੋਧੀ ਅੰਸਰ ਕੋਸਿਆ ਵੀ ਕੁਝ ਹੋਰ ਤਰੀਕੇ ਦੇ ਵਰਜਲਦੇ ਹੂੰ ਇਹ ਵੀ ਕਹਿ ਰਹੇ ਹਨ ਪ੍ਰਚਾਰਕ ਨੇ ਪੱਥਰ ਵਿੱਚੋਂ ਲਜੂਜੇ ਹੋਵੇ ਇੱਥੋਂ ਤੱਕ ਕਹਿਤਾ ਹੂੰ ਕਹ ਰਹੇ ਦੇ ਬਿਸ਼ਦੀ ਲੋਕ ਅਸਈ ਦੂਜੇ ਵੀ ਕਹਿੰਦੇ ਹੂੰ ਹੂੰ ਇਹਦਾ ਮਤਲਬ ਹੈ ਲੋਕ ਪਰ ਦੇ ਲੋਕ ਹੂੰ ਕਹਜੀ ਠੀਕ ਹੈ ਜੀ ਹਾਂ ਜੀ ਜਿਸ ਹਰ ਧਨ ਰਾਸ ਗੁਰਮੁਖੀ ਪੂਰਾ ਤਿਸ ਸ਼ਾਬਾਸ਼ ਹੋ ਸੋ ਸੱਚ ਜਿਸ ਹਰਤਲ ਰਾਤ ਜਿਹਦੇ ਕੋਲ ਇਹ ਹਰਤਲ ਦੀ ਰਾਤ ਹੁੰਦੀ ਆ ਉਹ ਸੱਚਾ ਸ਼ੌਅ ਹੈ ਤਾਂ ਸਾਡੀ ਲੋਭ ਉਹ ਸ਼ਾ ਹੈ ਸੱਚ ਉਹਦੇ ਕੋਲ ਹਰਤਾਂ ਮਿਲ ਜਾਂਦਾ ਜੇ ਉਹ ਉਹਦੇ ਕੋਲ ਹਰਤਾਂ ਕੋਈ ਲੈ ਲਵੇ ਤਾਂ ਆਪਣੀ ਅੰਦਰੋਂ ਲੱਭ ਲੈਦਾ ਆਪਣੇ ਥੱਲੇ ਹਾਲ ਨੂੰ ਲੱਭ ਲੈਂਦਾ ਹੈ ਠੀਕ ਹੈ ਪਰ ਹਰ ਬੇ ਲੈ ਸਕਦਾ ਉਹ ਤੋਂ ਉਹ ਲੱਭ ਕੇ ਨਹੀਂ ਦੇ ਸਕਦਾ اچھا ਉਹ ਲੱਭਣ ਦੀ ਬਿਲੀ ਇਸ ਬਿਜਾ ਸਕਦਾ ਹੈ ਲੱਭਣ ਦੀ ਬਿਲੀ ਦਾ ਦੱਸ ਸਕਦਾ ਲੱਭਣਾ ਉਹ ਨੂੰ ਆਪੇ ਤੂੰ ਠੀਕ ਹੈ ਉਹ ਗੁਰੂ ਪੂਰਾ ਸਵਾਗਤ ਸਰਗਾ ਜੀ ਨੂੰ ਸ਼ਾਬਾਸ਼ ਹੈ ਠੀਕ ਹੈ ਹਾਂਜੀ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਆਪ ਗਿਆ ਦੁੱਖ ਕਟਿਆ ਹਰ ਵਰ ਪਾਇਆ ਨਾਰ ਰੂੜੀ ਬਾਣੀ ਹਰ ਪਾਇਆ ਹਾਂਜੀ ਇਹ ਰੂੜੀ ਬਾਣੀ ਗੁਰਮਤਿ ਦੀ ਬਾਣੀ ਰੂੜੀ ਬਾਨੀ ਹੈ। ਇਸ ਬਾਣੀ ਨਾਲ ਹਰ ਪਾਇਆ। ਹਮ। ਹਰ ਸ਼ਬਦੀ ਦੀ ਚਾਰ ਹਰ ਗੁਰਬਾਣੀ ਕੀ ਜਿਹੜੇ ਸ਼ਬਦ ਦੇ ਉਪਦੇਸ਼ ਹੈ ਇਹਦੀ ਵਿਚਾਰ ਕਰਨ ਤੇ। ਜਿਹਦੀ ਵਿਚਾਰ ਕਰਨ ਹਰ ਪਾਇਆ। ਹਮ। ਵੀ ਪਾਇਆ ਇਸੇ ਤਰੀਕੇ ਨਾਲ ਪਾਇਆ ਹੋਰ ਕੋਈ ਤਰੀਕਾ ਹੀ ਨਹੀਂ। ਪੋਰਕ ਜene ਕਿ ਵੇਦ ਰਿਚਰ ਨਹੀਂ ਪਾਇਆ ਕੋਈ ਤਰੀਕਾ ਇਸੋਂ ਹਾਂ ਹਾਂ ਪੱਕੇ ਕਹਿੰਦੇ ਨੇ ਕੋਈ ਸਭ ਝੂਠ ਬੋਲਦੇ ਨੇ ਹਾਂ ਹਾਂ ਜਿਹੜੀਆਂ ਸਾਖੀਆਂ ਨੇ ਸਭ ਝੂਠੀਆਂ ਦੇ ਬਾਤੀਆਂ ਰੂੜੀ ਪਾਣੀ ਪਾਇਆ ਹਾਂ ਹਾਂ ਵਿਚਾਰ ਗੁਰ ਸ਼ਬਦੀ ਵਿਚਾਰ ਸਾਫੇ ਕਰ ਲੈ ਇਹ ਤੋਂ علاوہ ਜੇ ਕੋਈ ਕੁਝ ਕਹਿੰਦਾ ਹੈ ਚ ਲਿਖਿਆ ਹੈ ਜਾਂ ਝੂਠ ਬੋਲਦਾ ਬਹੁਤ ਕੋਝੂੜ ਹੋ ਰਹੇ ਨੇ ਇਹਨਾਂ ਦੇ ਸਭ ਬਹੁਤ ਕੋਈ ਫਰੋਡ ਕਰ ਰਹੇ ਨੇ ਲੋਕ ਠੀਕ ਆਪ ਗਿਆ ਦੁੱਖ ਟੱ ਗਿਆ ਖੜ ਬੜ ਪਾਇਆ ਨਾ ਠੀਕ ਆਪ ਗਿਆ ਦੁੱਖ ਆਪ ਗਿਆ ਆਪਾ ਪਾਵ ਉਹਦੀ ਆਪਣੀ ਮਰਜ਼ੀ ਮਰਜ਼ੀ ਆਪਣੀ ਮਰਜ਼ੀ ਖਤਮ ਹੋ ਗਈ ਆ ਪਾਵੇ ਖਤਮ ਹੋ ਗਿਆ ਮੈਂ ਦੇਖੀ ਹੋ ਗਿਆ ਦੁੱਖ ਹਾਰ ਲਾੜ ਪਾਇਆ ਨਾੜ ਹੂੰ ਕਿਹੜਾ ਬੰਦੇ ਦੇ ਕਾ ਬੰਦਾ ਬੈਨਾ ਬੁੱਤੀ ਦੇ ਅੱਗੇ ਉਹਨੇ ਰਾਏ ਛੜਤਾ ਦੇ ਅੱਗੇ ਮਨੂਹ ਨਹੀਂ ਦੀ ਕੋਨ دخل ਦਿੱਦਾ ਹੀ ਨਹੀਂ ਠੀਕ ਹੈ ਕੋਨ ਹਰ ਵਾਰ ਪਾਇਆ ਨਾੜ ਪਰ ਬੁੱਤੀ ਨਾਲ ਇੱਕ ਦੀ ਹਰਦੇ ਹੋ ਗਈ बुद्धि रूपी नाल ने सारू भर लिया हर दी तपती गल दी हरदे चलनी लग दी जी ठीक है जी